ਸਾਧ ਕੀ ਮਹਿਮਾ ਵੇਦਾ ਜਾਵੇ ਸਾਧ ਕੇ ਮਾਮਾ ਵੇਦ ਨਾ ਜਾ ਸਾਧ ਕੀ ਜਿਹੜੀ ਮਾਵਾ ਹੈ ਆਇਓ ਵੇਦ ਕੋਈ ਨਾ ਜਿਹੜਾ ਵੇਦ ਵੇਦ ਅਸੱਜ ਵੇ ਚੇਤਨੂ ਕਹਿੰਦੇ ਜਿਹੜਾ ਚਿੱਤਾਂ ਕਾ ਨਾ ਵੇਦ ਇਹ ਵੇਦ ਕਰਦੇ ਨੇ ਜੀ ਦੀਆਂ ਬਹੁਤ ਸਾਰੀਆਂ ਗੱਲਾਂ ਦੁਨੀਆ ਦੇ ਜਿੰਨੇ ਆਰਵਾਜ ਦੇ ਵਿਚ ਉਹ ਵੀ ਬੇਦੇ ਬੁੱਲੇ ਹਨ ਹਰਾ ਜਾਣਦੀਆਂ ਗੱਲਾਂ ਚੰਗੀਆਂ ਨੇ ਗੁਨਾਹ ਵਾਲੇ ਜਾਣਦੀਆਂ ਗੱਲਾਂ ਨੂੰ ਬੇਦਗੰਦੇ ਕਬੂਦੀਆਂ ਗੱਲਾਂ ਜੀ ਚੁਕੂ ਕਬੂਦੀਆਂ ਉਹ ਬੇਦ ਚਾਹੇ ਉਹ ਦਵਾਈ ਨਹੀਂ ਹੋ ਕਬੂਦੀ ਸਾਡੇ ਫਾਇਦੇ ਦੀ ਉਹ ਸਾਰੀ ਉਹ ਦੇ ਵਿੱਚ ਲਿਖਾ ਆ ਜਿਹੜਿਆ ਆਹ ਬ੍ਰਹਮ ਜੀ ਦਾ ਆਪ ਗਾਵੇ ਬ੍ਰਹਮ ਉਹਨੂੰ ਬ੍ਰਹਮ ਤੋਂ ਪਹਿਲਾਂ ਬ੍ਰਹਮ ਉਹ ਵੇਦ ਹੈ ਚਾਰੇ ਵੇਦ ਬ੍ਰਹਮ ਕੋ ਦਿੱਤੇ ਗਏ ਚਾਰੇ ਵੇਦ ਬ੍ਰਹਮ ਨੂੰ ਅਦਿਤਜਦੂ ਉਹ ਵੇਦ ਹੈ ਜਿਹੜਾ ਤੁਹਾਨੂੰ ਬਣਾਉਣ ਜਾਣਦਾ ਜੇ ਤੂੰ ਜਾਣ ਜਦ ਤੂੰ ਦੱਸਣ ਵਾਲਾ ਬਣੇ ਤੇ ਤੈਨੂੰ ਪੁੱਛੇ ਤਾਂ ਜਾਣਦਾ ਇਹ ਗੱਲ ਤੈਨੂੰ ਪੁੱਛਣੀ ਤੋਂ ਵੀ ਆ ਇੱਥੇ ਅਲੀ ਅਲੀ ਦੇਖਦਾ ਹੋਇਓ ਕੋਈ ਚੋ ਦੇਸੀ ਇਹਦੇ ਉੱਨੀ ਉਹ ਕਰ ਜਾਂਦਾ ਗਿਆਨ ਹੀ ਦਰੈ ਅੱਖਾਂ ਕਾਲੂ ਜੋ ਆਪਣੇ ਲੈਵਲ ਤੇ ਹੋਇਤੋ ਗਿਆਨ ਦਾ ਹੈ ਉਹ ਤੋਂ ਬੋਲੇ ਉਦੋਂ ਆ ਸਮਝ ਲੋ ਬੇਦ ਕੀ ਨੂੰ ਕਹਿੰਦੇ ਨੇ ਬੇਦ ਉਹਨੂੰ ਕਹਿੰਦੇ ਨੇ ਜਿਹੜਾ ਉਹ ਦਤਤਾਤਰਾ ਹੈ ਕੌਣ ਆ ਗਿਆ ਨੇ ਉਹ ਬੇਦ ਦਤਤਾ ਕਹਿ ਲਾ ਜਾਨਵ ਬੇਦ ਦੇ ਵਿੱਚ ਬੇਦ ਰੂਪ ਚ ਹੈ ਰਿਹਾ ਕਿਸੇ ਜੀ ਤੋਂ ਪ੍ਰਭਾਵਿਤ ਨਹੀਂ ਹੈ ਉਹ ਸਰ ਕੋ ਤੋਂ ਪ੍ਰਭਾਵਿਤ ਨਹੀਂ ਜਿਹੜਾ ਉਹ ਗੱਲਾਂ ਕਰਦਾ ਹੈ ਪਹਿਲਾਂ ਹੀ ਜਪਦੇ ਰਹੀ ਉਹਦਾ ਅਵਸਥਾ ਹੋਈ ਮਨੇ ਜਨਮਿਆ ਸੁਦਾ ਆਪਣਾ ਦਾ ਸਾਦਾ ਹਾਂਜੀ ਸਾਦ ਕੀ ਮਹਿਮਾ ਬੇਦ ਨਾ ਜਾਣੇ ਬਖਿਆਨੇ ਉਹ ਬੇਦ ਜਿਹੜਾ ਬੋਲਣ ਵਾਲਾ ਹੈ ਬੇਦ ਹੈ ਹੁਣ ਪਰ ਨਾਨਕ ਬੇਦ ਹੈ ਜਿਹੜਾ ਬੋਲਦਾ ਹੈ ਜੇਦਲ ਬੇਦ ਬੇਦ ਉਹ ਜਿਹਦੀ ਗੱਲ ਸੁਣਦਾ ਉਹਦੀ ਵੇਖਾਂ ਕਰ ਦਿੰਦਾ ਜਿੰਤਾ ਸੁਬੇ ਜਿਹੜਾ ਜਿਹੜਾ ਸੁਣਦਾ ਉਥੇ ਲੈਂਦਾ ਠੀਕ ਆ ਗਿਆ ਅਤ ਬ੍ਰਹਮ ਦਾ ਹੀ ਆ ਅਮਦੂ ਹਾਂ ਹਾਂ ਤੇ ਦੇ ਅਰਥਾਇ ਨੇ ਉਹ ਜਿਹੜੀਆਂ ਵਰਪਾਨੀਆਂ ਜਿਹੜਾ ਬ੍ਰਹਮਾ ਉਹ ਵੇਦਾ ਦਾ ਬ੍ਰਹਮਾ ਉਹ ਵੇਦਾ ਤੇ ਚਾਰੇ ਵੇਦ ਬ੍ਰਹਮੇ ਕੋ ਦिए ਪਰਮੇਸ਼ਰ ਨੇ ਉਹ ਦੱਸਦੇ ਨੇ ਅਰ ਸਿੱਤੇ ਵਰਪੇ ਨੂੰ ਹੈ ਅੰਦਰੋਂ ਯਵਨ ਨੇ ਬੈਤ ਜਿਹੜਾ ਖਿਆਲ ਹੈ ਇਹ ਜਿਹੜੇ ਦੂਰੇ ਵੀ ਖੋਜੀ ਹੁੰਦੇ ਨੇ ਕੋਈ ਘੱਟ ਨਹੀਂ ਤੇ ਬੜਾ ਹੁੰਦੇ ਨੇ ਸਬਰ ਸੰਤੋਖ ਵਾਲੇ ਹੁੰਦੇ ਨੇ ਐਵੇਂ ਨਹੀਂ ਉਹਦੇ ਬਥੇਰੇ ਸਾਰੀ ਜ਼ਿੰਦਗੀ ਕੋ ਖਬਤੇ ਨਾਲ ਥੋੜੀ ਸਿੰਪਲ ਜੀ ਲਾਈਫ ਹੁੰਦੀ ਸਾਦੀ ਜੀ ਹਾਂ ਸਾਦਗੀ ਮਹਿਮਾ ਉਤਮਾ ਦੂਰ ਸਾਦ ਉਪਮਾ ਤੋਂ ਗੁਣਾ ਤੋਂ ਦੂਰ ਸਾਦ ਦੀ ਉਪਮਾ ਤਾਂ ਇੰਨਾ ਗੁਣਾ ਤੋਂ ਪਰੇ ਹੈ ਉਹ ਇੰਨਾ ਗੁਣਾ ਤੋਂ ਪਰੇ ਦਾ ਗਿਆਨ ਕਿੱਥੋਂ ਲੈ ਆਵੇ ਮਾਇਆ ਤੋਂ ਪਰੇ ਦਾ ਗੱਲ ਕਿੱਥੋਂ ਲੈ ਮਾਇਆ ਦੇ ਅੰਦਰੋਂ ਤਾਂ ਮਾਇਆ ਦੇ ਅੰਦਰੋਂ ਸਾਰਾ ਗਿਆਨ ਲੈ ਲਾਂਗੇ ਉਹ ਜੇ ਬਾਹਰੋਂ ਤੋਂ ਗਿਆਨ ਹੋ ਕਿੱਥੋਂ ਲੈ ਜੀਏ ਸਾਦ ਦੀ ਜਿਹੜੀ ਉਪਮਾ ਇੰਨਾ ਗੁਣਾ ਤੋਂ ਪਰੇ ਰਹਿ ਜੋ ਤੋਂ ਸਤਿ ਪਰੇ ਰਹਿ ਜੋ ਤੋਂ ਦਾ ਸੰਸਾਰ ਬਣ ਜਾਵੇ ਇਹ ਤਾਂ ਦੁਨੀਆਵਾਂ ਦੀ ਗੱਲ ਆ ਦੁਨੀਆ ਦਾ ਪਰਮੇਸ਼ਰ ਦੀ ਅਵਸਥਾ ਕਿਹੜੀ ਰਬ ਦੀ ਅਵਸਥਾ ਹੁੰਦਾ ਪਰਮ ਦੀ ਅਵਸਥਾ ਹੁੰਦਾ ਉਹਦਾ ਫਿਰ ਉਹ ਉਹਦਾ ਉਹਦਾ ਬਲਾਇਆ ਹੀ ਬੋਲਦਾ ਕਰੇ ਕਹਿਣ ਨਿਰਗ ਨਿਰੰਕਾਰ ਉਹ ਜਿਹੜਾ ਬੁਲਾਉਂਦਾ ਤਾਂ ਹੀ ਬੋਲਦਾ ਸਾਧ ਕੀ ਉਪਮਾ ਰਹੀ ਪਰਪੂਰ ਸੰਸਾਰ ਭਰ ਕੇ ਪੂਰਾ ਨਹੀਂ ਹੋ ਰਿਹਾ ਸਾਰੇ ਜੀਵਾਂ ਦੇ ਗਿਆਨ ਨਹੀਂ ਵਧ ਰਿਹਾ ਇਹ ਸਾਧ ਕਰਕੇ ਹੀ ਆ ਸਾਰਿਆਂ ਨੇ ਭਾਂਡਾ ਭਰ ਕੇ ਸਾਧ ਹੋ ਹਰ ਤਾਂ ਉਹ ਕੋ ਪਾਈ ਜਾਂਦਾ ਨਾ ਸਾਰਿਆਂ ਦੇ ਵਿੱਚ ਗਿਆਨ ਪਾਈ ਜਾਂਦਾ ਦੂ ਪਾਈ ਜਾਂਦਾ ਹੈ ਗਿਆਨ ਵਾਲਾ ਪਾਠਾ ਸਾਰਿਆਂ ਦਾ ਕੋਈ ਖੱਪਰ ਹੀ ਕਿਹਦਾ ਕੱਟ ਗਿਆ ਹੁਣ ਉਹ ਕਿਹਦਾ ਕਿੰਨਾ ਭਰਿਆ ਕਿਹਦਾ ਕਿੰਨਾ ਕਿਹਦਾ ਕਿੰਨਾ ਕਿਹਦਾ ਗਿਆਨ ਵੱਧ ਘਟ ਹੋ ਸਕਦਾ ਸਾਰਿਆਂ ਦਾ ਖੱਪਰ ਭਰਨ ਖਾਤਰ ਆ ਗੁਰਬੰਦੀਏ ਉਹ ਸਾਧ ਦੀ ਉਪਮਾਨ ਹੈ ਤਾਂ ਭਰੇ ਨੇ ਖੱਪਰ ਭਰ ਰਹੀ ਹੈ ਹੁਣ ਜਿਹੜੇ ਬਾਕੀ ਰਹਿੰਦੇ ਖੱਪਰ ਨਾਲ ਉਹਨਾਂ ਦੇ ਭਰਨ ਨੇ ਮਾਰ ਖੱਪੜਾ ਮਨ ਨਹੀਂ ਰਜਾਇਦਾ ਇਹ ਚੀਜ਼ ਨਾਲ ਪਰ ਇਹ ਜਨਾਂ ਭਰਪੂਰ ਹੋਊਗਾ ਗਿਆਨ ਨਾਲ ਨਾਲ। ਆ ਕਿੰਨੀ ਕੈਚੀ ਨਾ ਭਰਪੂਰ ਹੋਤਾ। ਮਾਇਆ ਨਾਲੇ ਭਰਪੂਰ ਹੋਦਾ ਭਰਿਆ ਜਾ ਸਕਦਾ ਮਨ। ਮਾਰ ਖੱਪੜ ਕੱਟਾਇਆ ਜਾਂਦਾ ਹਰ ਉਪਰ ਅਤਾ ਹੈ ਡਾ ਖੱਪੜ ਹੈ। ਪਾਉ ਕੀ ਪਾਲੋਂ ਵਿੱਚ ਫੇਰਦਾ। ਹਰ ਜਗ੍ਹਾ ਬੈਠੀ ਹੈ। ਇਹ ਗਿਆਨ ਨਾਲੇ ਭਰੂਆ ਰੋਜ਼ ਨਾਲ ਤਾਂ ਪਰਝੂਗਾ। ਮੋੜ ਕੇ ਜੀ ਨਾ ਬੋਲੋ ਸਾਧ ਕੀ ਉਪਮਾ ਰਹੀ ਸਰਪੂ ਸਾਧ ਦਾ ਹੀ ਗਿਆਨ ਦੇ ਰਿਹਾ ਜੋ ਸਾਧ ਉਪਮਾ ਕਰ ਰਿਹਾ ਉਹੀ ਪਰ ਰਹੀ ਹੈ ਲੋਕਾਂ ਨੇ ਦੇਖੋ ਨੰਦਰਾ ਫਿਰ ਸਾਧਾ ਨੇ ਉਪਮਾ ਕੀਤੀ ਹੈ ਸਾਧ ਦੀ ਕੀਤੀ ਹੋਈ ਉਪਮਾ ਸਾਧ ਦੀ ਹੋਈ ਉਹ ਸਾਧ ਦੀ ਹੋਈਆ ਪਰਮੇਸ਼ਰ ਦੀ ਹੋਈਆ ਦੋ ਇੱਕੋ ਹੀ ਨੇ ਉਹਦੇ ਵਰਗਾ ਸੁਭਾਅ ਹੈ ਉਹਦਾ ਇਹ ਤੇ ਲੈਣਾ ਜਿਹੜੀ ਸਾਦ ਦੀ ਉਪਮਾ ਕੀਤੀ ਹੋਈ ਆ। ਸਾਦ ਬੋਲੇ, ਪਹਿਲਾ ਮੀਤਾ ਬਾਣੀ ਸਾਦੇ ਚਲਾ ਰਿਹਾ, ਦੂਜੇ ਜੂ ਤੋਂ ਦੂਜਿਆਂ ਜੁਨੋਂ ਨੂੰ ਸੱਦਿਆ ਹੋਇਆ ਮਾਨਾ ਉਹੀ ਤਾਂ ਚਲਾ ਰਿਹਾ। ਹਾਂ। तो अगर लगा थाना बैठा अंदर नहीं मुझे सारे को कंट्रोल करना है आप एयर कंट्रोल करते हैं धरे है साध की शोभा का नहीं अंत साध की शोभा का नहीं साध की सोपा कोई अंत नहीं है सोपा सदा भी अंत साध की शोभा सदा ही अनंत है कहीं भी होना अंत घालवांत हो जू, सदा ब्यांत हमेशा ब्यांतते रही है ਸਾਰੇ ਨੇ ਬਿਨਸੇ ਕੇ ਨਰੇ ਅਤ ਸਾਰ ਆਰ ਪਾਰ ਬ੍ਰਹਮ ਕੋਈ ਫਰਕ ਨਹੀਂ ਗਿਆਨ ਕੇ ਸਾਥ ਪ੍ਰਭ ਜੀ ਨਾਮ ਬਾਈ ਅੱਗੇ ਆ ਜੀ ਉਹ ਉਹ ਬੁਲਾਉਂਦਾ ਬੋਲਦਾ ਗੱਲ ਤਾਂ ਇੱਕੋ ਹੀ ਆ ਦੋਹਾਂ ਦੀ ਇਹ ਉਹਦੀ ਉਪਮਾ ਹੈ ਕੋਈ ਐ ਅਕਰਾਈ ਹੋ ਰਹੇ ਹੁਣ ਇਹਦਾ ਭੇਦ ਕਿੰਨੂ ਹੋਊਗਾ ਬੋਲਣ ਵਾਲਾ ਇਦਾ ਪੇਜ ਨਹੀਂ ਹੈ ਉਹਦਾ ਕਹਿੰਦਾ ਵੀ ਜੈਜਾ ਦਰਿਆ ਤਾਂ ਕਹਿੰਦਾ ਕਹਿੰਦਾ ਹੁਣ ਪਾਣੀ ਕਿਹਾ ਜਾ ਕਹਿੰਦਾ ਕਿ ਜੈਜਾ ਪਿੱਛੋਂ ਆ ਗਿਆ कहां ਆ ਗਿਆ ਮੈਨੂੰ ਵੀ ਪਤਾ ਜੈਜਾ ਨੂੰ ਪਤਾ ਕਰੇ ਕਹੇ ਜਾ ਪਾਣੀ ਆ ਜਾਂਦਾ ਕਹੇ ਜਾ ਜਾਂਦਾ ਕਹਿੰਦਾ ਭਾਈ ਤਾਂ ਪੀਣਾ ਥੀਲਾ ਨਹੀਂ ਨਾਲ ਹੀ ਜੇ ਤਾਂ ਇਹ ਜਿਹਾ ਹੀ ਹੁੰਦਾ ਪਿੱਛੋਂ ਜੈ ਜੀ ਮਾਵੇ ਕਿ ਜੈ ਜੀ ਆਪਾ ਗਲਪੇ ਪਾਣੀ ਚੱਲ ਰਹਾ ਸੜਕਾਂ ਤੇ ਲੱਲ ਤੇਰੇ ਮਸਲਬ ਦਾ ਲੈਦਾ ਨੇ ਨਾ ਸਹੀ ਇਹਦਾ ਇਹ ਜੋ ਸਾਦ ਕੀ ਉੱਚ ਤੇ ਉੱਚੀ ਸਾਦ ਕੀ ਉੱਚ ਤੇ ਉੱਚੀ ਉੱਚ ਤੇ ਉੱਚੀ ਹੈ ਸੋਪਾ ਬਹੁਤ ਉੱਚੀ ਵਸਾ ਦੀ ਗੱਲ ਹੈ ਬਹੁਤ ਬਰੀਕ ਗੱਲ साध की सोपा बूचते मुच्छ बूची आ जेड़े मजबूत है कहंदा ने बगाला वजंदार गलला फायदार गलला जे कोई कहे मेरी गल बहुत मजबूत है त मजबूत न भी मजबूत है वजनदार में वजनदार गलला बूचते बूची साध की सोपा साध बन आई ਸਾਧ ਕੀ ਸੋਪਾ ਹੀ ਸਾਧਾ ਰੂਪ ਢੜ ਕੇ ਹੈ ਨਾਨਕ ਸਾਧ ਪ੍ਰਭ ਤੇ ਨਾ ਪਾਈ ਇਸ ਕਰਕੇ ਸਾਧ ਅਨੁਭਵ ਦੇ ਵਿੱਚ ਕੋਈ ਪਤਾ ਪ੍ਰਭ ਚ ਰਾਮ ਕਬੀਰ ਆਏ ਪਏ ਹੈ ਹੁਣ ਜਿਹੜਾ ਪੂਰਨ ਬ੍ਰਹਮ ਹੈ ਕਹਾ ਬਾਰ ਉਹ ਬੋਲ ਬਰਮਾ ਬਾਲਵਾ ਜੀ ਸੰਗੀਏ ਸਾਹ ਫਿਰ ਇੱਕਾ ਇੱਕ ਤੋਂ ਬਾਅਦ ਬਾਲਵੋ ਨੇ ਸਿੱਖ ਆਵੇ ਬਾਲਵਾ ਮੈਂ ਹੁਣ ਬੁਲਾਇਆ ਬੋਲਦਾ ਫਿਰ ਫਿਰ ਜਾਣੀ ਉਹ ਬੋਲਣ ਸਿੱਖਦਾ ਹੀ ਹੈ ਬੁਲਾਇਆ ਉਹ ਇੱਥੇ ਹੀ ਸਖਲਣਾ ਇੱਛਾ ਦੇਖਿਆ ਕਿ ਹੋ ਰਿਹਾ ਜਦ ਹੁਕਮ ਨੂੰ ਬੁਝਲਣਾ ਚਲ ਹੁਕਮ ਬੁਝਲਿਆ ਮਨਾ ਚਲ ਗਿਆ ਬੇ ਜਿਵੇਂ ਹਾਲ ਚੱਲ ਪਿਆ ਸਾਧ ਕੀ ਸੋਪਾ ਸਾਧਵਾਂ ਆਈ ਸਾਧ ਕੀ ਸੋਪਾ ਸਾਧਵਾਂ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਨਾਨਕਾ ਸਾਧ ਅ ਪ੍ਰਭ ਦੇ ਵਿੱਚ ਕੋਈ ਫਰਕ ਨਹੀਂ ਆ ਸਾਧ ਜਿਹੜਾ ਹੈਗਾ ਉਹ ਮਾਨਸੀ ਜਿਹੜਾ ਪ੍ਰਭ ਸੀ ਉਹ ਚਿਤ ਸੀ ਇਹ ਦੋਏ ਹੁਣ ਇੱਕ ਨੇ ਇਸ ਕਰਕੇ ਜਿਹੜਾ ਚਿੱਤ ਹੈ ਉਹ ਜਿਹੜਾ ਸੀ ਨਾ ਪਿਤਾ ਦਾ ਜਨਮ ਕੋਈ ਨਹੀਂ ਪਤਾ ਇਹਨਾਂ ਨੂੰ ਕੋਈ ਪਤਾ ਹੈ ਕਿ ਨਹੀਂ ਇਹ ਕੀ ਗੱਲ ਹੈ ਉਹਨੋਂ ਗੱਲ ਨਹੀਂ ਕਰ ਸਕਦੇ ਪਹਿਲਾਂ ਕਾਜ਼ੀ ਨੂੰ ਪਤਾ ਵੀ ਜਾਂ ਤਨ ਪਤਾ ਕਿ ਕਾਜ਼ਾ ਨੂੰ ਹੀ ਜਾਣਾ ਪੂਜੇ ਹੁਣ ਜਬ ਇਹਨਾਂ ਦੇ ਪੁੱਤੇ ਇਕੱਠੇ ਹੋਵੇ ਉਹਨੋਂ ਸ਼ਤ ਨਹੀਂ ਲਾਗੂ ਉਹਨੋਂ ਗੱਲ ਨਹੀਂ ਕਰ ਸਕਦੇ